دکھنے محلہ पंजवा, موچھیاو تخت پیری مہنجے بادشاہ پاںب ملاوے کول کمل جویں بگ ساب دو پتی پرمیشر دا تخت انا ویدو تا گل گیا خیال یا لب گیا ویدو تم پچھلی پاونڑی تو کہاں گل چلی ہے جی ہاں جی ہاں جی موچھیاو تخت پیری مہنجے ਜਿੰਨੇ میرے ਪਾਸ ਜਾਂ ਫਿਰ ਦਾ ਤਖਤ ਹੈ ਮੇਰੂ ਤਾਂ ਵੇਖਿਆ ਪਈ ਉਹ ਕਿ ਜੋ ਦੇਤੀ ਗੁਰੂ ਮਹਿਲ ਬੁਲਾਈਆਂ ਹਾਂ ਜੀ ਆ ਤਖਤ ਹੈ ਤਖਤੇ ਆਪਣਾ ਰਾਜ ਮਿਲ ਗਿਆ ਠੀਕ ਹੈ ਜੀ ਪਾਪ ਮਿਲਾਵੇ ਕੋਲ ਕਵਲ ਜਿਵੇਂ ਬਿਗ ਸਾਬ ਬੁਲਾ ਲਿਆ ਸਮਝ ਲੋ ਕਬਲ ਹਿਰਦਾ ਖੜ ਗਿਆ ਇਕ ਕੋਲ ਬੈ ਕੇ ਉਹਦੇ ਨਾਲ ਬੈ ਕੇ ਬੁਲਾਇਆ ਵੀ ਬੋਲ ਤੂੰ ਮੈਨੂੰ ਬੁਲਾਉਂ ਨਾ ਇੱਕ ਵਾਰ ਫਿਰ ਕਦੋਂ ਖੜ ਗਿਆ ਹਰਦਾ ਜੀ ਤਾਂ ਹਰਦਾ ਕਵਨ ਪ੍ਰਗਾਸਿਆ ਹਾਂ ਜੀ ਐ ਮਿਲਾਵੇ ਤੋ ਕੀ ਹੋ ਗਿਆ ਪਾਪ ਮਿਲਾਵੇ ਕੋਲ ਚੱਲ ਨੂੰ ਨਾ ਬੁਲਾ ਲਿਆ ਮੈਂ ਤੂੰ ਆਪਣੇ ਚੱਲ ਨੂੰ ਬੁਲਾ ਲਿਆ ਜੋੜ ਲਿਆ ਠੀਕ ਹੈ ਜੀ ਇਹ ਹਿਰਦਾ ਕਮਲ ਜਿਵੇਂ ਵਿਗਸ ਆਵਦੋ ਹੁਣ ਹਿਰਦਾ ਰੂਪੀ ਕਮਲ ਜਿਹੜਾ ਹੈ ਉਹ ਵਿਗਸ ਗਿਆ ਹੈ ਜੀ ਖਿੜ ਗਿਆ ਉਹ ਨਾਨਕ ਭਗਤਾਂ ਸਦਾ ਬਿਗਾਸ ਠੀਕ ਹੈ ਇਹ ਹੁਣ ਸਾਰੀ ਉਸ ਪੌੜੀ ਦੀ ਜਿਹੜੀ ਇਸੇ ਪੰਕਤੀ ਦੀ ਵਿਆਖਿਆ ਚੱਲ ਰਹੀ ਹੈ ਜੀ ਬਿਲਕੁਲ ਮਾਰੂ ਰਾਗ ਹੁਣ ਕਰਕੇ ਹੁਣ ਉੱਥੇ ਪਹੁੰਚ ਗਏ ਆਪਣਾ ਚੌਥਾ ਪਾਜ਼ਾਰ ਲੈ ਲਿਆ ਜੀ ਹਾਂ ਆ ਗਏ ਤੁਸੀਂ ਇੱਥੇ ਆ ਗਏ ਉਹ ਤਾਂ ਜ਼ਰਤਾ ਦੀ ਜਵਾਬ ਲਈ ਤਾਂ ਫਿਰ ਆਪ ਜਵਾਬ ਸ਼ੁਰੂ ਕੀਤਾ ਜਿਹਨੂੰ ਗੋਲਨਾਮ ਕਰਦੇ ਉਹਦੇ ਵਿੱਚ ਕੀਤਾ ਹੋਇਆ ਸਿੱਧ ਗੋਸ਼ਟ ਵਿੱਚ ਹਾਂਜੀ ਮਹੱਲਾ ਪੰਜਵਾਂ ਤੇਰੀਆਂ ਭੁੱਖ ਮੂੰਹ ਲਾਵਣ ਥੀ ਵਿਥਰਾ ਜਾਨ ਮਿਠਾਈ ਇਕ ਬੇਈ ਪੀੜੇ ਨਾ ਹੁਟਾਏ ਜੇਲੀ ਤੇਰੀ ਦੀ ਨਾਮ ਦੀ ਭੁੱਖ ਹੈ ਨਾ ਹਾਂਜੀ ਭੁੱਖ ਦੀ ਭੁੱਖ ਸਮਝ ਲਓ ਜਿਵੇਂ ਉਹ ਇੱਕ ਦੀ ਮਿੱਠਾ ਹੁੰਦਾ ਨਾ ਮੂੰਹ ਲੱਗ ਜਾਂਦਾ ਫਿਰ ਛੁੱਟਦਾ ਦੀ ਠੀਕ ਹੈ ਜੀ ਪਿਰਿਆ ਸੰਧੜੀ ਭੁੱਖ ਮੂੰਹ ਲਾਵਣ ਥੀ ਵਿਥਰਾ ਹਾਂ ਜੀ ਇਹ ਤਾਂ ਲੱਗ ਜਾਂਦਾ ਫਿਰ ਛੁੱਟਦਾ ਦੀ ਪਰ ਬ੍ਰਹਮ ਗਿਆਨੀ ਦੀ ਗੱਲ ਨੇ ਪਿਰਿਆ ਸੰਧੜੀ ਭੁੱਖ ਮੂੰਹ ਲਾਵਣ ਥੀ ਵਿਥਰਾ ਬਸਾਲ ਤਾਂ ਬਹਲ ਲਿਓ ਜਿਹੜੀ ਹੈ ਜਿਹਦੇ ਸੱਚ ਦੀ ਜੀ ਨਾਲ ਭੁੱਖ ਹੋ ਜਾਂਦੀ ਹੈ ਕਦੇ ਭੁੱਖ ਮਿਟੀ अच्छा एड़ा ऐत ਭਾਰਤਾਂ ਨੇ ਵੀ ਮੈਂ ਆਪ ਉਹਦਾ ਭੋਜਨ ਬਣ ਜਾਵਾਂ ਨਹੀਂ ਨਹੀਂ ਨਹੀਂ ਨਾਮ ਕੀ ਲੱਗਦਾ ਭੁੱਖ ਠੀਕ ਹੈ ਪ੍ਰਿਆ ਸੰਦਣੀ ਭੁੱਖ ਮੂੰਹ ਲਾਵਣ ਸਥੀ ਬਿਥਰਾ ਬਿਥਰਾ ਕੀ ਹੁੰਦਾ ਜਦੋਂ ਤਾਂ ਲੱਗੀ ਹੋਈ ਆ ਉਹ ਫਿਰ ਭੁੱਖ ਲਗਾਤਾਰ ਲੱਗੀ ਰਹਿਣੀ ਚਾਹੀਦੀ ਹੈ ਮਾਇਆ ਦੀ ਭੁੱਖ ਇਹ ਭੁੱਖ ਜਦ ਵੀ ਖਤਮ ਹੋ ਗਈ ਜਿਵੇਂ ਬੱਚਾ ਜਾਂ ਦੁੱਧ ਹਰ ਲੈ ਜੇ ਉਹ ਰਾਜੇ ਜਨ ਦਾ ਤਾਂ ਜੜ ਦੱਸ ਸਸੇ ਭੁੱਖ ਲੱਗੀ ਹੋ ਰਹਿਣੀ ਚਾਹੀਦੀ ਹੈ ਅੱਛਾ ਜੀ ਹੁਣ ਫਿਰ ਅਗਲੀ ਪੰਕਤੀ ਸਪਸ਼ਟ ਕਰਦੇ ਹਾਂ ਜਾਨ ਮਿਠਾਈ ਇਕ ਬਈ ਪੀੜੇ ਨਾ ਹਟੇ ਜਿਵੇਂ ਕਹਿੰਦਾ ਗੱਲੇ ਦੀ ਦਾ ਮਿੱਠਾ ਉਹਨੇ ਉਹ ਲੱਗ ਗਿਆ ਤੂੰ ਚੁੱਪੀ ਜਾ ਉਹ ਨੂੰ ਉਹ ਰਾਜਾ ਨਹੀਂ ਹੋ ਗਏਦਾਂ ਠੀਕ ਹੈ ਭੀਪੋ ਖੰਡ ਰਹਿੰਦੀ ਹੋਇਆ ਉਹ ਥਾਂ ਜਿਵੇਂ ਤੁਸੀਂ ਕਹਿੰਦੇ ਰੱਜ ਕੇ ਛੱਡਦਾ ਉਹ ਨਹੀਂ ਛੱਡ ਨਹੀਂ ਸਕਦਾ ਉਹ ਹਮੇਸ਼ਾ ਉਹਦੇ ਨਾਲ ਜੁੜਿਆ ਰਹੂ ਹਾਂ ਉਹ ਜੁੜਿਆ ਹੀ ਰਹਿੰਦਾ ਠੀਕ ਹੈ ਜੀ ਭਗਤਾਂ ਦੀ ਇਹੀ ਹਾਲਤ ਰਹਿੰਦੀ ਹੈ ਜੀ ਉਹ ਹਮੇਸ਼ਾ ਜੁੜੇ ਇਹ ਲੱਗੀ ਰਹਿਣੀ ਚਾਹੀਦੀ ਐ ਨੌਬਦੀ ਭੁੱਖ ਸਦਾ ਤੇ ਬਾਯਾ ਦੀ ਭੁੱਖ ਜੜੀ ਉਹ ਰੇੜੀ ਹੁੰਦੀ ਚਾਹੀਦੀ ਕਦੇ ਲੱਕੜੀ ਹੁੰਦੀ ਚਾਹੀਦੀ ਠੀਕ ਹੈ ਜੀ ਮਹੱਲਾ ਪੰਜਵਾਂ ਠੱਗਾ ਨੀ ਮਤ ਜਾਣ ਗੰਦਰਬਾ ਨਗਰੀ ਜਿਹੜੀ ਮਤ ਹੈ ਇਰਾਦੀ ਗੰਦਰਬਾਂ ਦੀ ਜਿਹੜੀ ਵਿਆਹ ਨੇ ਦਿੱਤੀ ਹੋਈ ਹੈ ਨਾ ਧਰਬ ਹੁੰਦੇ ਨੇ ਕਿੰਦਰ ਕਦ ਧਰਬ ਗਾਨ ਕਰਾਂ ਗਣ ਦੇ ਛਪ ਛਿਰ ਰਸਤੇ ਦਿਖਾ ਤੇ ਬਲੀ ਹੋਈਆਂ ਸਤਗ ਲੋਕ ਉਸ ਵੇਲੇ ਦੀ ਗੱਲ ਐ ਜਦੋਂ ਬਾਖਾ ਤੇ ਇਦਾਂ ਲਿਖਿਆ ਜਿਹੜੇ ਦੰਧਰ ਕੋ ਕਹਉਂਦੇ ਨੇ ਨਾ ਰਾਗ ਗਦਿਆ ਦੇ ਵਿੱਚ ਜਿਹੜੇ ਕਹਿੰਦੇ ਨੇ ਇਹਦੇ ਤੇ ਜੀ ਪੱਥਰ ਪਗੜ ਤੇ ਉਹ ਤੇ ਉਹ ਕਹਿੰਦੇ ਠੱਗਾ ਦੀ ਗੱਲ ਐ ਉਹ ਮਤਰੋੜ ਐ ਉਹ ਉਹ ਜਿਹੜੀ ਹੈਗੀ ਆ ਉਹ ਮਤ ਠੀਕ ਨਹੀਂ ਹੈ ਜੀ ਅੱਛਾ ਜੀ ਠੱਗਾ ਨਹੀਂ ਮਤਰੋੜ ਜਾਣ ਗੰਧਰਵਾ ਨਗਰੀ ਉਦਾਂ ਉਦਾਂ ਮੱਤ ਦੇ ਵਿੱਚ ਜਿਵੇਂ ਰੋੜਾ ਹੋਣਾ ਬਾਟ ਇਹ ਰੋੜੇ ਹੋਣ ਰਾਹ ਦੇ ਵਿੱਚ ਉਹ ਚੱਲਿਆ ਨਹੀਂ ਜਾ ਸਕਦਾ ਉਸ ਰਸਤੇ ਤੋਂ ਇਹ ਲਗਦਾ ਧਰਬਨਗਰੀ ਦਾ ਧਰਬਾਂ ਦੀ ਜਿੱਡੇ ਗੱਲ ਕਹਿੰਦੇ ਨੇ ਨਾ ਵੀ ਤੇ ਧਰਬ ਜਿਹੜੇ ਨੇ ਪਹੁੰਚ ਜਾਂਦੇ ਨੇ ਉਹ ਵੀ ਰਾਗ ਨਾਲ ਜੁੜ ਕੇ ਉਹ ਥੰਗੀ ਵਾਲੀ ਗੱਲ ਹੈ ਰਾਗ ਨਹੀਂ ਹੈ ਹਾਂ ਰਾਗ ਜਿਹੜਾ ਗੁਰਬਾਣੀ ਰਾਗ ਚ ਲਿਖੀ ਹੈ ਉਹ ਸਿਰਫ ਕੋੜਾ ਸੱਚ ਹੈ ਉਹ ਸਿਰਫ ਬਣਾ ਕੇ ਦਿੱਤਾ ਹੋਇਆ ਸਾਡਾ ਕੋੜਾ ਲੱਗਦਾ ਆਮ ਆਦਮੀ ਨੂੰ ਉਹ ਤਾਂ ਰਾਗ ਹੈ ਹਰ ਆਦਮੀ ਦਾ ਧਿਆਨ ਖਿੱਚਣ ਵਾਸਤੇ ਅਗਰ ਸ਼ੁਰੂ ਕਰਨ ਵਾਸਤੇ ਜੇ ਰਾਗ ਰਹਾਗ ਹੈ ਸੱਚ ਤੋਂ ਬਿਲੋ ਉਹ ਗੰਦਰਬਾਂ ਦਾ ਜਿਹੜਾ ਰਾਗ ਹੈ ਜੁਰਤਕਾਰੀ ਕਰਦੇ ਹੁੰਦੇ ਸੀ ਉਹਨਾਂ ਦੇ ਉੱਤੇ ਕਟਾਕਸ਼ ਕੀਤਾ ਹੈ ਕੰਧ ਭਾਵ ਵੀ ਕੱਚੀ ਬਾਣੀ ਨਾਲੋਂ ਤੋੜਿਆ ਹੋਇਆ ਗੱਲਾਂ ਨੇ ਪੱਕੀ ਦੀਆਂ ਗੱਲਾਂ ਉਹ ਤਾਂ ਸਭੋਂ ਰਸਤੇ ਦੇ ਰੋੜੇ ਨੇ ਮਾਰਗ ਦੇ ਵਿੱਚ ਇਹ ਜੀ ਦੇ ਮਾਰਗ ਦੇ ਵਿੱਚ ਰੋੜੇ ਸੱਚੇ ਮਾਰਗ ਤੋਂ ਛੜਕਾਏ ਨਹੀਂ ਲੋ ਠੀਕ ਹੈ ਜੀ ਉਹ ਗੱਲਾਂ ਹਾਂ ਇਹਨਾਂ ਨੇ ਲਿਖਿਆ ਵੀ ਜਿਵੇਂ ਅੱਖ ਨੂੰ ਨਹੀਂ ਉਹ ਦਿਖਦਾ ਹੁੰਦਾ ਮరిగਿ ਤੇਸ਼ਨਾ ਜਾਣ ਕੇ ਦਰਬੰਗਰੀ ਇਹ ਤੇ ਮరిగਿ ਤੇਸ਼ਨਾ ਤਾਂ ਨਹੀਂ ਜਾਣ ਕੇ ਕਹਿੰਦੇ ਨੇ ਹੁਣ ਮరిగਿ ਤੇਸ਼ਨਾ ਕਹਿਣ ਕੇ ਜਾ ਗੱਲ ਘੱਟ ਹੋਈ ਹੈ ਉਹਨਾਂ ਦੀ ਗੱਲ ਉਹਨਾਂ ਨਹੀਂ ਘੱਟਦੀ ਦੇਵਤਿਆਂ ਦੀ ਗਦਰਬੰਗਰੀ ਹੁਣ ਉਹਨਾਂ ਨੇ ਅਰਥ țeਡੇ-ਵੇਡੇ ਕਰਕੇ ਆਪਣੀ ਜਾਨ ਤੇ ਹੋਈ ਹੈ ਉਹਨਾਂ ਨੇ ਤਾਂ ਹੁਣ ਨਿਕਲਣਾ ਸੀ ਕਿਸੇ ਤਰੀਕੇ ਨਾਲ ਉਹਨਾਂ ਦੀ ਫੱਟੀ-ਪੋਚੀ ਹੋਈ ਹੈ ਉਹਨਾਂ ਕਿਵੇਂ ਮਰਦਾਂ ਦੀ ਸਾਡੀ ਪੱਟੀ ਪੋਚੀ ਹੋਈ ਹੈ ਐਡੇ ਕੇ ਕਰ ਦਿੰਦੇ ਨੇ ਅਸਲੀ ਮਤ ਨੂੰ ਤੋੜ ਕੇ ਪੇਸ਼ ਕੀਤਾ ਹੋਇਆ ਹੈ ਬਸ ਉਹ ਕਹਿੰਦੇ ਆ ਇੱਕ ਤਾਂ ਹੈਗਾ ਇਸ ਨੂੰ ਧੋਖੇ ਦਾ ਦ੍ਰਿਸ਼ ਜਾਣ ਕੇ ਤੂੰ ਛਲੀਆਂ ਨਾਲੋਂ ਪ੍ਰੀਤ ਤੋੜ ਲੈ ਤੇ ਜਿਹੜੇ ਪ੍ਰੀਤ ਟੀਕੇ ਵਾਲੇ ਆ ਉਹ ਕਹਿੰਦੇ ਆ ਜੋ ਇਸਤਰੀ ਪ੍ਰਤਿਆਗ ਠਗ ਹੈ ਇਨਕਾ ਨੇਹ ਮਿੱਠਿਆ ਜਾਣ ਕੇ ਤੂੰ ਤੋੜ ਜੈਸੇ ਗੰਦਰਵ ਨਗਰੀ ਮਿਥਿਆ ਹੈ ਤੈਸੇ ਇਹ ਹੈ ਕਿਸੀ ਰੁੱਤ ਮੈਂ ਉੱਤਰ ਕੁਦਰਤੀ ਕਿਲੇ ਕੋਟ ਸੂਰਜ ਉਦੇ ਕਾਲ ਮੈਂ ਪ੍ਰਤੀਤ ਹੁੰਦੇ ਹਨ ਤਿੰਨ ਕੋ ਸ਼ਾਸਤ੍ਰ ਮੈਂ ਗੰਦਰਵ ਨਗਰ ਕਾ ਵਾਸਤਵ ਮੈਂ ਕੁਛ ਹੋਤਾ ਨਹੀਂ ਕੋਈ ਇਹ ਵੀ ਗੰਦਰਵ ਨਗਰ ਦਾ ਮਤਲਬ ਹੈ ਵੀ ਦਿਖਣ ਦੀ ਇੱਕ ਸੋਚ ਹੈ ਪਰ ਹੈ ਉੱਥੇ ਕੁਛ ਨਹੀਂ ਐ ਨੇ ਹੁਣ ਤਾਂ ਅਰਥ ਕੀਤੇ ਠੀਕ ਹੈ ਇਹ ਨੇ ਅਸਲ ਗੱਲ ਤੋਂ ਸਾਨੂੰ ਪਟਕਾ ਹੱਸਾ ਕਿਉਂਕਿ ਸਾਡੇ ਕੋਲ ਤਾਂ ਹੈ ਨਹੀਂ ਦਸਮ ਘਰ ਦੇ ਵਿੱਚ ਇਹਦਾ ਫਲਸ ਹੈ ਅੱਛਾ ਜੀ ਇਹ ਸੀ ਦਸਮ ਘਰ ਨਹੀਂ ਫੜਦਾ ਹੈ ਕਿਹਨਾਂ ਬਸਾ ਸਾਨੂੰ ਪਤਾ ਲੱਗਦਾ ਕੀ ਗੱਲ ਹੈ ਉੱਥੇ ਨਾਲੇ ਕਿੰਨਾ ਦੰਦਰਬ ਗਾਨ ਕਰਨ ਦਣ ਜੱਛਾ ਪਛਿਰ ਦਿੱਸ ਦਿਖਾਣਾ ਸੰਗਰ ਕੀ ਕਰ ਫੁੱਲ ਕੀ ਬਰਖਾ ਬਰਖਾਵਾਂ ਆਰਤੀ ਕੋਟ ਕਰਾਂ ਸੁਰ ਸੁੰਦਰ ਜਿਹੜਾ ਸੁਰਗ ਲੋਕ ਆ ਉਹਦੀ ਗੱਲ ਹੈ ਤਾਂ ਉੱਤਰ ਦੇਸ਼ਾ ਕਹਿੰਦਾ ਉਹ ਉੱਤਰ ਦੇ ਵਿੱਚ ਪਹਾੜ ਨੂੰ ਸੁਰਗ ਲੋਕ ਮੰਨਦੇ ਸੀ। ਸਾਹਿਬ ਸਿੰਘ ਜੀ ਨੇ ਲਿਖਿਆ, "ਹੇ ਭਾਈ ਦੁਨੀਆਂ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ। ਇਸ ਦੁਨੀਆਂ ਨੂੰ ਧੂਏ ਦਾ ਪਹਾੜ ਸਮਝ, ਦੁਨੀਆਂ ਦਾ ਦੋਖ ਕੜੀਆਂ ਦਾ ਸੁਖ ਮਾਣਿਆ। ਇਸ ਜੀਵ ਰਾਹੀ ਨੂੰ ਅਨੇਕਾਂ ਜੁਨਾਂ ਵਿੱਚ ਪਟਕਣਾ ਪੈਂਦਾ ਹੈ।" ਗੰਦਰਬ ਨਗਰੀ ਨੂੰ ਇਹ ਧੂਏ ਪਹਾੜ ਕਹਿੰਦੇ ਆ ਜੀ। ਕੱਲ ਤਾਂ ਉਹੀ ਆ ਵੀ ਕੁਝ ਬਾਸਤਵ ਵਿੱਚ ਕੁਝ ਉਹਨਾਂ ਤੂ ਦਾ ਪਾਲ ਕਹਿੰਦਾ ਵੀ ਪਰਮ ਜੋ ਇਸਤਰੀ ਪਰਤਿਆਜ ਠੱਗ ਹੈ ਇਸਤਰੀ ਲਿਖਦੇ ਜੈਸੇ ਗੰਦਰਬ ਨਗਰੀ ਮਿੱਠਿਆ ਹੈ ਜਿਹੜੇ ਸੁਰਗ ਦੀ ਗੱਲ ਕਰਦੇ ਨੇ ਨਾ ਸੁਰਗ ਦੀ ਗੱਲ ਇਹ ਠੱਗੀ ਹੈ ਕੁਛ ਨਹੀਂ ਹੈ ਉੱਥੇ ਸੁਰਗ ਸਰਗ ਨਰਕ ਇੱਥੇ ਐ ਸਤ ਸੁਰਗ ਨਰਕ ਤੇ ਮਾਇ ਰਹੇ ਉਹ ਸਤਗੁਰ ਕੇ ਸੁਰਗ ਕੁਛ ਨਹੀਂ ਹੁੰਦਾ ਜੇ ਨਰਮ ਨਗਰੀ ਸੁਰਗ ਨੂੰ ਕਹਿੰਦੇ ਨੇ ਸੰਦੇ ਵਿੱਚ ਸੁਰਗ ਲੋਕ ਦੇ ਨੂੰ ਕਹਿੰਦੇ ਨੇ ਸਤਿਗੁਰੂ ਜੀ ਠੀਕ ਹੈ ਉਹ ਥੱਗੀ ਆ ਸੁਰਗ ਦਾ ਤੁਹਾਨੂੰ ਲਾਲਚ ਦੇ ਰਹੇ ਨੇ ਉਹ ਠੱਗ ਦੇ ਕਹਿਣ ਦਾ ਉਹ ਕਹਿੰਦਾ ਜੀ ਚੌਥੇ ਗੱਲ ਇਸ਼ਾਰਾ ਕਲੀ ਜਾਂਦੇ ਸੱਚ ਬੋਲਦੇ ਦੀ ਤੂੰ ਮਾਤਿਆਂ ਦੀ ਸੁੱਖ ਘਟਾਉ ਦੂਏ ਇਸ ਸੰਧਾਣੂ ਜਿਹੜਾ ਸੁੱਖਾਂ ਦੇ ਵਿੱਚ ਦੇਣਾ lal sukh de utthe sukh de oh katta hai oh akhan katta paunde ne sukh nahi hai ge alpsukh de oh sukh maande dukh aage aave to sukh hambur ban gaya paave ehi keh reha kabir jis dukh te shiv brahm darr che var brahma ae sukh de dare ne vishnu vi dareya devte vi dare idhar ni dareya oh idhar wale sukh jehda idhar puri hai oh oh ਇੱਥੇ ਉੱਥੇ ਜਿਹੜੇ ਸੋਹਣੇ ਹਾਲ ਸੁਖ ਨੇ ਉੱਥੇ ਪਰਮ ਸੁਖ ਨੇ ਉਸੋ ਕਦੀ ਬਗਦੇ ਦੋ ਨਹੀਂ ਬਗਦੇ ਦਾ ਸ਼ਿਵ ਨੇ ਬੰਗਿਆ ਨਾ ਬ੍ਰਹਮਾ ਨੇ ਬੰਗਿਆ ਸੁਖ ਨੇ ਇਹ ਵਿਸ਼ਣੂ ਦੇ ਸੁਖ ਨੇ ਰਾਜ ਕਰਕੇ ਰਾਜ ਵੀ ਬੰਗਿਆ ਰਾਜ ਨੂੰ ਚਾਹੂੰ ਭੁਗਤਣਾ ਚਾਹੂੰ ਉਹ ਜਿਹੜੇ ਸੁਖ ਨੇ ਬਹੁਤ ਸਾਡੇ ਲਾਲਚ ਨੂੰ ਦਿੱਤਾ ਠੀਕਾ ਠਾ ਪਾਇਆ ਹੋਇਆ ਸੁਖ ਨਹੀਂ ਹੈ ਇਸ ਬੰਧਾਨ ਘਰ ਆ ਜਿਹੜਾ ਸੰਸਾਰ ਹੈ ਇਹਦੇ ਵਿੱਚ ਬਹੁਤ ਸਾਰੇ ਸੁੱਖ ਨੇ ਜਿਹੜੇ ਤੁਹਾਡੇ ਬੰਦੇ ਹੋਏ ਅਸੀਂ ਸਾਰੇ ਲੋਕ ਮੰਡੀ ਬੈਠੇ ਹਾਂ ਇੰਨੇ ਹੀ ਹਨ ਸੁੱਖ ਇਹ ਸੁੱਖ ਜੱਟ ਪਤਾ ਲੱਗੂਗਾ ਨਹੀਂ ਹਨ ਧਰ ਕਾਣੇ ਦਾ ਭਾਵੇਂ ਇਹਨਾਂ ਨੇ ਕੀਤਾ ਵੀ ਹੋਰ ਦੁਬਾਰਾ ਜਨਮ ਮਰਨ ਦੇ ਚੱਕਰ 'ਚ ਹਰੇਕ ਬਾਕੀ ਹੋਰ ਸਰੀਰਾਂ 'ਚ ਆਉਣਾ ਪਊ ਇਹ ਨਹੀਂ ਠੀਕ ਇਸ ਬੰਧਨ ਘਰ ਕਣੇ ਇਸ ਸਾਲ ਦੇ ਵਿੱਚ ਜਿੱਦੇ ਵੀ ਸੁੱਖ ਲੇ ਬਹੁਤ ਸਾਰੇ ਸੁਧਾਰ ਸੁਧਾਰ ਕਰ ਲਈ ਹੈ ਅੱਛਾ ਕਰਮ ਦੀ ਦੀ ਬੈਠੇ ਸਰੀਰ ਧਰਨੀ ਹੈ ਇਸ ਹੈ ਨਾ ਇਸ ਲਵ ਹੈ ਆਇਆ ਸਰੀਰ ਦਾ ਅਵਕਾਰ ਬੰਦੀ ਬੈਠਿਆ ਦੁਨੀਆਂ ਦਾ ਇੱਥੇ ਜਿਹੜੇ ਸੁੱਖ ਦੇ ਸੰਸਾਰੀ ਬਹੁਤ ਦੇ ਜਿਹੜੇ ਬੰਦੇ ਹੋਏ ਪਾਈ ਇਹ ਸੁੱਖ ਨਹੀਂ ਹੈ ਕੋਈ ਵੀ ਇਹਨਾਂ ਨੂੰ ਸੁੱਖ ਨਾਲ ਬੁੱਝੋ ਤੁਸੀਂ ਅੱਛਾ ਘਰ ਕਣੇ ਤੋਂ ਕੀ ਭਾਵ ਹੈ ਦਾ ਮਤਲਬ ਜ਼ਿਆਦਾ ਹੁੰਦਾ ਉਹ ਸਾਰੇ ਸੁੱਖ ਨੇ ਸੰਸਾਰ ਦੇ ਵਿੱਚ ਸਾਡੇ ਕਿੰਨੇ ਸੁੱਖ ਬੰਦੇ ਹੋਏ ਨੇ ਠੀਕ ਹੈ ਜੀ ਉਹਨਾਂ ਸੁੱਖਾਂ ਨੂੰ ਸੁਖ ਨਾ ਮੰਨੋ ਕੋਈ ਘਣਾ ਸੁੱਖ ਨਹੀਂ ਹੈ ਅਲਪ ਸੁੱਖ ਹੈ ਜੀ ਉਹ ਸੁੱਖ ਉਹ ਸੁੱਖ ਨਹੀਂ ਹੈ ਅਸਲ ਦੇ ਵਿੱਚ ਥਾਗੀ ਆ ਉਹ ਠੀਕ ਹੈ ਜੀ ਅਸੀਂ ਉਸ ਤੋਂ ਮੰਗਦੇ ਆ ਨਾ ਜਾ ਕੇ ਅਸਲ ਦੇ ਵਿੱਚ ਧਰਮ ਦੇ ਵਿੱਚ ਅਸੀਂ ਮੰਗਦੇ ਹੀ ਉਹ ਚੀਜ਼ਾਂ ਜਾ ਕੇ ਆਪਾਂ ਜਾਣਦੇ ਆ ਰਾਸ ਕਿੱਡੀ ਕਰਦੇ ਆ ਉਹ ਆ ਹਟਾਇਆ ਹੋਇਆ ਫਿਰ ਤੂੰ ਦਹੋਰ ਜੇ ਗੁੱਣਾ ਫਿਰ ਤੂੰ ਖਾਂ ਕੇ ਦੁੱਖ ਪੰਗਦੇ ਆ ਸੁਖ ਫਿਰ ਤੂੰ ਖਾਂ ਕੇ ਦੁੱਖ ਦੇਖੋ ਠੀਕ ਹੈ ਜੀ ਅਸਾ ਕੋਈ ਮੰਗਦਾ ਹੀ ਨਹੀਂ ਹਾਂ ਹਾਂ ਜੀ ਪੌੜੀ ਅਕਲ ਕਲਾ ਨਹਿ ਪਾਈਐ ਪਰਬ ਅਲਖ ਅਲੇਖਣ ਆ ਗੱਲ ਇੱਥੇ ਆ ਕੇ ਜਮਾਂ ਕਲੀਅਰ ਕਰਦੇ ਨੇ ਦਰਸ਼ਣ ਦੇ ਨਾਲ ਛੇ ਸ਼ਾਸਤਰ ਨੇ ਦਾ ਬਹੁਤ ਅਲੱਖ ਹੈ ਰੁਕੀ ਬੁੱਧੀ ਤੋਂ ਗਿਆਨਿਤ ਰਿਆ ਤੋਂ ਪਰੇ ਹੈ ਅਲੇਖ ਹੈ ਲੇਖ ਵਿੱਚ ਨਹੀਂ ਹੈ ਇੱਥੇ ਲੇਖੇ ਦੀ ਗੱਲ ਕੀਤੀ ਹੋਈ ਹੈ ਸਿਮਰਤ ਸ਼ਾਸਤਰਾਂ ਸਾਰੇ ਗ੍ਰੰਥਾਂ ਚ ਨਾਨਕ ਤਰਕਾ ਲੇਖਾ ਪਾਟਿਆ ਲੇਖੇ ਛਾੜ ਅਲੇਖ ਹੈ ਅਲੇਖੇ ਦੇ ਵਿੱਚ ਛੁਟਕਾਰਾ ਲੇਖੇ ਛੁਟਕਾਰਾ ਲਈ ਜਮੁਰ ਬਲਨ اپنی عقل نال عقل کلا نہ پائی اپنی عقل دی شکت دی نال پرب الاکلے روح کسے ਨੇ بد متیے دے اپنی عقل نال جینے اپ اپنی بڈھ جیتی برد پت پیرتو تے ٹھیک جنے પ્રાપ્ત نہیں کیتا اج تک ٹھیک ہے جی کھٹ درشن بھم تے پھرے نہ ملیے پےکھن چھ درشن دے ایںے پےکھنے کسے ਕਿਸੇ ਨੂੰ ਪ੍ਰਾਪਤੀ ਨਹੀਂ ਹੋਈ ਭਰਮ ਕੀ ਫਰਦ ਪਰਮ ਦੇ ਵਿੱਚ ਫਰਦੇ ਜਰੂਰ ਨਹੀਂ ਮਿਲਿਆ ਕਿਸੇ ਪੇਖ ਦੀ ਸਾਰੇ ਪੇਖ ਬਦਲ ਲਏ ਕਿਸੇ ਨੂੰ ਪੇਖ ਵੀ ਮਿਲਿਆ ਅਚਾ ਪੇਖ ਔਰ ਦਰਸ਼ਨ ਅਲੱਗ ਲੱਗਿਆ ਜੀ ਦਰਸ਼ਨ ਤਾਂ શાਸਤਰ ਜੀ ਗ੍ਰੰਥ ਜੀ ਨਾਲ ਨਾ ਮਿਲਿਏ ਪੇਖਨ ਕੀ ਨਾਲ ਨਹੀਂ ਹੈ ਜੇ ਮਿਲਿਆ ਕਿਸੇ ਨੂੰ ਹੈ ਕੋਈ ਹੋਰ ਚੀਜ਼ ਹੈ ਪੇਖ ਧਾਰੀ ਨਹੀਂ ਹੈ ਆਪਾ ਆਪਾ ਜਿਹੜਾ ਬਾਣਾ ਪਾਉਂਦੇ ਇਹਨੂੰ ਪੇਖ ਕਹਿਣ ਲੱਗੇ ਹਾਂਜੀ ਸਾਡਾ ਭੇਖ ਨਹੀਂ ਵਰਦੀ ਹੈ ਕੋਈ ਵੀ ਹੂੰ ਹੂੰ ਦੇਖਦੇ ਖਲਾਫ ਹੈ ਸਿੱਖ ਦਾ ਕੋਈ ਭੇਖ ਨਹੀਂ ਹੈ ਸਿੱਖ ਹੈ ਕੋਈ ਵੀ ਜੇ ਕੋਈ ਖੱਤ ਦਰਸ਼ਨ ਪੜ ਕੇ ਕੋਈ ਭੇਖ ਧਾਰ ਲਵੇ ਪ੍ਰਾਪਤੀ ਨਹੀਂ ਹੈ ਪ੍ਰਭ ਦੀ ਹਾਂਜੀ ਨਾ ਨਾ ਆਪ ਸਾਰੇ ਭੇਖ ਧਾਰੀ ਹੋਏ ਨੇ ਮੱਤਾ ਮੱਤਾ ਮੁਤਾਲਬ ਨੇ ਕਿਸੇ ਨੂੰ ਸਾਰੇ ਭਰਮ ਦੇ ਫਿਰਦੇ ਨੇ ਪਰ ਕਿਸੇ ਨੂੰ ਪ੍ਰਾਪਤੀ ਕੋਈ ਨਹੀਂ ਹੋਈ ਠੀਕ ਹੈ ਜੀ ਵਰਤ ਕਰੈ ਚੰ드ਰਾਇਣਾ ਸੇਕ ਕਿਤੇ ਨਾ ਲੇਖਣ 베ਦ ਪੜੈ ਸਾਰ ਨਾ ਪੇਖਣ ਦੇਖੋ ਜਿਤ ਲੈਣਾ ਵਰਤ ਕਰਦੇ ਵਰਤ ਕਰੈ ਚੰ드ਰਾਇਣਾ ਇਹਦਾ ਮਤਲਬ ਇਹ ਮੁਸਲਮਾਨ ਧਰਮ ਦੀ ਗੱਲ ਆ ਰਹੀ ਹੈ ਵਰਤ ਕਰੈ ਚੰ드ਰਾਇਣਾ ਸਿੱਧੂ ਕਰਦੇ ਵੀ ਜਦੋਂ ਤੇ ਵਰਤ ਵਰਤ ਲਫਜ਼ ਆਇਆ ਨਾ ਉਹ ਵਰਤ ਨਹੀਂ ਕਰਦੇ ਉਹਨਾਂ ਦੇ ਰੋਜ਼ ਦੇ ਤੇ ਰੋਜ਼ੇ ਵਰਤਿੱਕੇ ਗੱਲ ਹੋ ਗਈ ਉਹ ਵੀ ਨਾ ਚੰਦ ਨੂੰ ਦੇਖ ਕੇ ਹੀ ਤੋੜ ਦੇ ਹਾਂਜੀ ਸਹੀ ਸਹੀ ਠੀਕ ਹੈ ਤੁਹਾਡੀ ਗੱਲ ਬੜੀ ਸਮਝਦਾ ਤੁਹਾਡੀ ਗੱਲ ਉਹ ਪੂਰੇ ਮਹੀਨੇ ਦੀ ਗੱਲ ਐ ਤੇ ਚੰਦ ਨੂੰ ਦੇਖ ਕੇ ਨਹੀਂ ਤੋੜਦੇ ਵੱਟੋ ਜਦ ਰੈਣੇ ਪਰ ਕਰਦੇ ਨੇ ਇਹ ਕਰਦੇ ਵੀ ਜਦ ਤੇ ਸਵਾਦ ਦਾ ਪ੍ਰਭਾਵ ਪਿਆ ਕੇ ਉਹ ਤੇ ਅgetElementById ਥਿਤ ਬਾਦ ਨੂੰ ਜੋਗੀ ਜਾਣਾ ਰਤਮਾਹਣਾ ਕੋਈ ਜੋਗੀ ਉਹਦੇ ਵਿੱਚੋਂ ਆਇਆ ਹੋਇਆ। ਜਿਦਵਾਨੇ ਵੀ ਅਪਣਾ ਲਿਆ ਸੀ ਕੋ ਨਾਨਕ ਕਿਤੇ ਪਹਿਲਾਂ। ਠੀਕ ਆਇਆ ਮੁਸਲਮਾਨ। ਕੀ ਵੀ ਠੀਕ ਆਇਆ ਮੁਸਲਮਾਨ ਹੋ ਕਿਸੇ ਲੇਖੇ ਚ ਨਹੀਂ ਹੈ। ਕੋਈ ਗਿਆਨ ਰੂਪੀ ਲੇਖੇ ਚ ਨਹੀਂ ਪੈਂਦੇ ਹਾਂ ਜੀ। ਆ ਉਹਦਾ ਪ੍ਰਾਪਤੀ ਨਹੀਂ ਹੈ ਉਹਦੇ ਵਿੱਚੋਂ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨ ਵੇਤ ਸਾਰਾ ਪੜ ਲਿਆ ਜਦੋਂ ਅਸੀਂ ਗੁਰਬਾਣੀ ਦੇ ਪਾਠ ਕਰਦੇ ਰੋਜ਼ ਕਰਦੇ ਪਾਠ ਕਰਦੇ ਪੜਦੇ ਨੇ ਵਿਚਾਰਦੇ ਸਪੂਰਨ ਪੂਰਾ ਵੇਦ ਪੜ ਲਿਆ ਤੁਸੀਂ ਕਹੇ ਪਰ ਵਿਚਾਰਿਆ ਨਹੀਂ ਕਿ ਅੱਛਾ ਇਹ ਫਿਰ ਆਪਣੀਆਂ ਅਖੰਡ ਪਾਠ ਦੀ ਗੱਲ ਆ ਗਈ ਜੀ ਤਾਂ ਇੱਥੇ ਆਪਾਂ ਨੂੰ ਸਜਾਗ ਕੀਤਾ ਕਿ ਜੇ ਕੋਈ ਪੂਰਾ ਵੇਦ ਵੀ ਪੜ ਲਵੇ ਗ੍ਰੰਥ ਪੜ ਲਵੇ ਤਤ ਸਾਰਨਾ ਪੇਖਣ ਪਰ ਪੜ ਪੜ ਗੱਡੀ ਦਿੱਤੀ ਹੈ ਅਖੰਡ ਪਾਠ ਦੀ ਸਹਿਜ ਪਾਠ ਦੀ ਦੋਹਾਂ ਦੀ ਅੱਗ ਠੀਕ ਹੈ ਮੈਂ मैद ਪੜਦੀ ਅਧ ਪੜਨ ਦੀ ਗੱਲ ਠੀਕ ਹੈ ਵੇਦ ਪੜੇ ਸੰਪੂਰਨ ਤਤ ਸਾਰ ਨ ਪੇਖਣ ਇਹਦਾ ਮਤਲਬ ਇਹਦੀ ਉਹਨੇ ਤਤ ਸਾਰ ਵਿੱਚੋਂ ਦੇਖ ਲਿਆ ਤਤ ਉਹਨੂੰ ਲੱਭ ਗਿਆ ਪੜਨ ਵਾਲਿਆ ਨੂੰ ਤਤ ਨਹੀਂ ਮਿਲਦਾ ਹੁੰਦਾ ਵਿਚਾਰਨ ਵਾਲਿਆ ਨੂੰ ਮਿਲ ਜਾਂਦਾ ਜੇ ਕੋ ਕਹਿੰਦੇ ਪਹਿਲਾਂ ਇਸ਼ਨਾਨ ਕਰਦੇ ਨੇ ਧੋਦੇ ਦੇ ਵੀ ਇਹਨੂੰ ਪਿੱਛਾ ਧੋਦੇ ਨੇ ਇਸ਼ਨਾਨ ਉਹ ਇਸ਼ਨਾਨ ਕਹਿੰਦੇ ਤਾਂ ਇਸ਼ਨਾਨ ਕਹਿੰਦਾ ਵੇਖੇ ਇੱਥੇ ਅੱਛਾ ਇਸ਼ਨਾਨ ਤੋਂ ਬਾਅਦ ਤਿਲਕ ਲਾਇਆ ਜਾਂਦਾ ਹਾਂ ਉੱਥੇ ਗੰਗਾ ਫਿਰਦੇ ਹੁੰਦੇ ਨੇ ਨਾ ਤੁਹਾਨੂੰ ਲੈ ਕੇ ਉਹ ਤਿਲਕ ਲਾ ਲਓ ਤੁਸੀਂ ਇਸ਼ਨਾਨ ਕਰੋ ਉਹ ਨੂੰ 24 24 ਜੋ ਵੀ ਦੇਣਾ ਰੁਪਈਆ ਦੇ ਦਿਓ ਹਾਂ ਪਹਿਲਾਂ ਇਸ਼ਨਾਨ ਕਰਨਾ ਤਿਲਕ ਪਿਛੇ ਲਾਉਣ ਅੰਤਰ ਕਾ ਲਿਖ ਅੰਦਰ ਕਾਲਾ ਹੈ ਦੱਸੋ ਵੀ ਬਾੜ ਤੁਸੀਂ ਤਿਲਕ ਵੀ ਲਾ ਲਿਆ ਕਿ ਅੰਦਰ ਦੀ ਕਾਲਖ ਤਾਂ ਦਿਲ ਦੀ ਥੋ ਹੈ ਫੇਰੇ ਦਾ ਕੀ ਬਾਈ ਮਤਲਬ ਰਹਿ ਗਿਆ ਜੀ ਤੇ ਕੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖਣ ਜਿਹੜਾ ਜਦ ਤਿਲਕ ਲਾਇਆ ਉਹ ਵੇਖੋਗੇ ਸਸ ਕੱਲੇ ਤਿਲਕ ਨਾਲੇ ਵੇਖ ਬੰਗਿਆ ਉਹ ਪਤਾ ਲੱਗ ਗਿਆ ਵੀ ਐਦੂ ਹੈ ਤੁਸ ਤਿਲਕ ਲਾਉਂਦਾ ਨਹੀਂ ਉਹ ਸਿੱਖ ਲਾਉਂਦਾ ਸਮਝਿਆ ਨਹੀਂ ਸਾਡੇ ਸਾਡੇ ਲਿਖ ਦਿੱਤਾ ਤਿਲਕ ਨਾਦਰ ਉਹ ਟਿੱਕਿਆਂ ਦੀ ਗੱਲ ਕੁਝ ਹੋਰ ਤੇ ਜਿੱਦਾਂ ਪੌਦ ਆ ਮਤਲਬ ਨੂੰ ਲੈ ਕੇ ਉਹ ਟਿੱਕਾ ਜਿਹੜਾ ਤਿਲਕਾ ਹੈ ਉਹ ਬਣਾਤਾ ਇੱਕ ਆਹ ਨੂੰ ਟਿੱਕਾ ਬਣਾਤਾ ਉੱਥੇ ਠੀਕ ਹੈ ਜੀ ਕਹਿੰਦੇ ਨਹੀਂ ਵੇਖਣਾ ਲੱਭਿਆ ਕਿਸੇ ਨੂੰ ਤਿਲਕ ਲਾਉਣ ਨਾਲ ਵੇਖ ਬਣਿਆ ਪਹਿਲਾਂ ਸ਼ਨਾਨਾ ਵੇਖ ਲਈ ਸੀ ਬਣਿਆ ਤੇ ਲਾਤੀ ਤਿਲਕ ਦੀ ਵੀ ਠੀਕ ਹੈ ਸੱਚੀ ਸਖਿਆ ਦੇ ਬਣਾ ਕਿਸੇ ਨੂੰ ਕੱਲੇ ਏਸ ਗੱਲ ਨਾਲ ਕਿ ਮੈਂ ਢੇਕ ਪਾ ਲਿਆ ਤਿਲਕ ਲਾ ਲਿਆ ਅਜਰੇ ਉ ਪਾ ਲਿਆ ਜੋ ਵੀ ਕੁਛ ਹੈ ਕਿਸੇ ਨੂੰ ਕੁਝ ਨਹੀਂ ਲੱਭਿਆ ਸੱਚੀ ਸਖਿਆ ਜੋ ਲੱਭਿਆ ਇਹ ਲੱਭਿਆ ਫਿਰ ਉਹ ਚਾਹੇ ਢੇਕ ਬਣਾਵੇ ਚਾਹੇ ਨਾਮ ਬਣਾਵੇ ਪੱਡਾ ਧੋਵੇ ਆ ਨਾ ਧੋਵੇ ਉਹਦਾ ਕੋਈ ਮਤਲਬ ਨਹੀਂ ਉਹ ਹਾਂ ਤਾਂ ਮੰਨ ਸੀ ਠੀਕ ਹੈ ਜੀ ਭੂਲਾ ਮਾਰਗੀ ਸੋ ਪਵੇ ਜਿਸ ਤੁਰ ਮਸਤਕ ਤਿੰਨੀ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੇ ਤਾਂ ਰਸਤਾ ਭੁੱਲ ਜਵੇ ਕਿਵੇਂ ਮਾਰਗ ਪਵੇ ਰਸਤਾ ਭੁੱਲ ਗਿਆ ਇੱਕ ਵਾਰ ਉਲਟੇ ਰਾ ਜਾ ਰਹੇ ਹਾਂ ਪੰਜੇ ਤਰ ਤਰ ਗਾਹਾਂ ਤੇ ਕਿਰਪਾ ਹੋਵੇ ਪਹਿਲਾਂ ਲੇਖ ਲਿਖਿਆ ਆਇਆ ਹੋਵੇ ਪੱਕਾ ਭੁੱਲਿਆ ਹੋਇਆ ਉਹੀ ਮਾਰਗ ਪੈਂਦਾ ਕਿਉਂ ਜਦ ਉਹਨੂੰ ਪਤਾ ਲੱਗਦਾ ਹੈ ਬਣ ਲੈਂਦਾ ਫਟ ਰਸਤਾ ਬਦਲ ਲੈਂਦਾ ਦੇ ਰਸਤਾ ਹੀ ਬਦਲਦਾ ਸਮਝ ਕੇ ਜਾਣ ਕੇ ਵੀ ਨਹੀਂ ਬਦਲਦਾ ਇੱਕ ਜਗੰਦੇ ਨਾਂ ਲੈਣ ਕਿ ਦੇ ਉਠਾ ਠੀਕ ਹੈ ਜੀ ਤਿੰਨੀ ਜਨਮ ਸਵਾਰੇ ਆਪਣਾ ਜਿਨ ਗੁਰ ਅੱਖੀ ਦੇਖਾਂ ਉਹਨਾਂ ਨੇ ਆਪਣਾ ਜਨਮ ਸਵਾਰਿਆ ਜਿਨ੍ਹਾਂ ਨੇ ਆਪਣਾ ਗੁਰਦੇਵਤਰੋਂ ਆਪਣੇ ਬੂਲ ਦੇ ਦਰਸ਼ਨ ਕਰ ਲਏ ਆਪਣੇ ਗੁਰਦੇਵ ਤੇ ਠੀਕ ਹੈ ਪਰ ਅੱਖੀ ਦਾ ਭਾਵ ਇੱਥੇ ਅੰਦਰ ਦੀਆਂ ਅੱਖਾਂ ਹੈ ਜੀ ਅੰਦਰਲੇ ਸਰੀਰ ਦੀਆਂ ਅੱਖਾਂ ਆਹ ਤੁਹਾਨੂੰ ਮੋਕੇ ਦੇ ਤੇ ਕਿਉਂਕਿ ਇਹ ਨਿਰਾਕਾਰੀ ਗੱਲ ਹੈ ਤਾਂ ਨਿਰਾਕਾਰੀ ਦੇ ਜਿਹਨੂੰ ਜਿਹਦੀ ਬੁੱਧੀ ਚ ਗੱਲ ਸਮਝ ਆ ਗਈ ਨਾ ਇਹ ਨੂੰ ਸੱਚੀ ਸਿੱਖ ਮਿਲ ਸੱਚੀ ਸਿੱਖੰਗ ਫਿਰ ਭੁੱਲੇ ਮਾਰਗ ਤੇ ਪੈਗੇ ਤੇ ਉਹਨਾਂ ਹਾਂ ਫਿਰ ਹੋਰ ਨਹੀਂ ਬਚਾਲ ਦੀ ਗੁਰਬਾਨੀ ਸੱਚੀ ਸਿੱਖਿਆ। ਸਮਝ ਪਈ ਤਾਂ ਸਮਝ ਜਿਹੜਾ ਸਮਝ ਪੈ ਗਈ ਫਿਰ ਦਰਸ਼ਨ ਹੋ ਗਿਆ। ਠੀਕ ਹੈ ਜਨਮ ਸਵਾਰਿਆ ਤੋਂ ਦਾ ਜਿਹੜਾ ਠੀਕ ਆਦਿਆ। ਸਮਝੋ ਸਰਕਾਰ। ਚਾਰੇ ਪਦਾਰਥ ਮਿਲ ਗਏ ਜੀ। ਬਿਲਕੁਲ ਚਾਰੇ ਮਿਲ ਗਏ। ਠੀਕ ਹੈ ਜੀ। ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ। ਹਾਂ